ਇਸਤੇ दूर, दूर कहां को जाए, ਉਪਰੇ ਰੱਖਣ ਹੱਥ ਆਏ ਇਸਤੇ ਦੂਰ ਕਹਾ ਕੋ ਜਾਏ ਸੱਚ ਨੂੰ ਛੱਡ ਕੇ ਦੂਰ ਕਿੱਥੇ ਚਲਾ ਜਾਊ ਕੋਈ ਉਪਰੇ ਰੱਖਣ ਹੱਥ ਆਏ ਉਹ ਪਹਿਲਾਂ ਤਾਂ ਡੁੱਬਿਆ ਹੋਇਆ ਡੁੱਬਿਆ ਸੀ ਬੜਾ ਡੂੰਘਾ ਉਪਰੇ ਹੀ ਤਾਂ ਰੱਖਣ ਹੱਥ ਉਤੇ ਕਪਾਲ ਇਹ ਕਪਾਲ ਕਹਿੰਦੇ ਨੇ ਆ ਜੋ ਕਪਾਲ ਪਾਣੀ ਤੇਲ ਕਪਾਲ ਬਰਾਬਰ ਆਇਆ ਨਾ ਦਾ ਜਿੱਤੇ ਡੁੱਬਿਆ ਆਇਆ ਤਾਂ ਨਾ ਅੱਖਾਂ ਦੀ ਬਾਹਰ ਆਇਓ ਨੱਕ ਦੀ ਬਾਹਰ ਆਇਆ ਹੋਣੀ ਬਾਹਰ ਆਇਆ ਆਇਓ ਦਾ ਕਪਾਲ ਕਪਾਲ ਇਹ ਪਾਣੀ ਦੇ ਥੋੜੇ ਬਰਾਬਰ ਆਇਆ ਜੇ ਉੱਤੇ ਨੂੰ ਆਉਣਗੇ ਹੋਰ ਥੋੜੇ ਜਿਹਾ ਉੱਪਰ ਸੱਚ ਦੀ ਤੇਕ ਨਾਲ ਤਾਂ ਅੱਖਾਂ ਤੱਕ ਬਾਹਰ ਆਊ ਜਿੱਦਾਂ ਗਲ ਤੱਕ ਬਾਹਰ ਆ ਗਿਆ ਉਦੋਂ ਸਮਝੋ ਜਿਹੜਾ ਗਲ ਤੱਕ ਬਾਹਰ ਆ ਗਿਆ ਉਹ ਉبرਿਆ ਉबरे ਰੱਖਣ ਹਾਰ ਧਿਆਏ ਰੱਖਣ ਹਾਰ ਜਿ ਬਚਾਉਣ ਵਾਲੇ ਦੇ ਧਿਆਨ ਬਚਾਉਣ ਵਾਲਾ ਡੁੱਬਿਆ ਨਹੀਂ ਹੋਇਆ ਬਾਹਰ ਹੈ ਬਚਾਉਣ ਵਾਲਾ ਬਾਹਰ ਹੈ ਡੁੱਬਿਆ ਨਹੀਂ ਹੋਇਆ ਜੇ ਬਚਾਉਣ ਵਾਲੇ ਧਿਆਨ ਕੀਤਾ ਤੇ ਉੱਪਰ ਨੂੰ ਜਾਣਾ ਫਿਰ ਬਚਾਉਣ ਵਾਲਾ ਬਾਹਰ ਖੜਾ ਉਹਦਾ ਡੁੱਬਿਆ ਨਹੀਂ ਹੋਇਆ ਉबरे ਰੱਖਣ ਵਿਕਰਾਲ ਦਾ ਅੰਤ ਰਿਆ ਉੱਪਰ ਨੂੰ ਆ ਗਏ ਉਹਨੇ ਉੱਪਰ ਨੂੰ ਖਿੱਚ ਲਿਆ ਦੂਰ ਕਹਾ ਕੋ ਜਾਏ ਉਬਰੇ ਲੱਖਾਂ ਮਾਰ ਪਿਆਏ ਉਹ ਤੇ ਦੂਰ ਜਾਂਦੇ ਨੇ ਸੱਚ ਨੂੰ ਛੱਡ ਡੁੱਬਦਾ ਆਪ ਜੇ ਤੇ ਹੰਰਖਣਾ ਹੋਈ ਜਾਂਦਾ ਤਬਹਾਰ ਹੋਣੀ ਨਿਰਪਉ ਜਪੇ ਸਗਲ ਪਉ ਮਿਟੇ ਪਰਮ ਕਿਰਪਾ ਦੇ ਡੁੱਬੂਗਾ ਤਰਕੁੜੀ ਤੇ ਆਂਦਾਊਗਾ ਦਬੂਬ ਤਰਕੁੜੀ ਦਾ ਜੋਰ ਨਾਲ ਮਾਰਨ ਵਾਲਾ ਕੋਈ ਕੰਮ ਕਰੂਗਾ ਚਿੰਤਾ ਹੋਊਗੀ ਚਿਤਤੀ ਰਹੂਗੀ ਪਤਾ ਨਹੀਂ ਕੰਮ ਸਰ ਇਹ ਪਤਾ ਨਹੀਂ ਢੀਕਣਾ ਜਿਹਾਂ ਲੋਕਾਂ ਨੂੰ ਚਿੰਤਾ ਹੈ ਤਰਕੁੜੀ ਰੰਦ ਇਹੇ ਹੀ ਦੱਸਦਾ ਵਜਾਦਾ ਹਿਰਦੇ ਜੋ ਬੈ ਕੰਮ ਆਦਾ ਫਿਰ ਜਿਤਨੀ ਵਾਣੀ ਮਿਰ ਕੋ ਜਪੈ ਸਗਰ ਕੋ ਮਿਟੈ ਪ੍ਰਭੂ ਕਿਰਪਾ ਤੇ ਪ੍ਰਾਨੇ ਛੁਟਾ ਹੈ ਦੇਰਪਾ ਜੱਪਾ ਦੇਰਪਾ ਨੂੰ ਜਪਨਾ ਹੈ ਆਇ ਬੁਖਤ ਨੂੰ ਜਪਦਾ ਹੈ ਸਮਝ ਲੈਂਦਾ ਤਾਂ ਹੈ ਬੁਖਤ ਨੂੰ ਸਮਝ ਲੈਣੋ ਜਦ ਹੈ ਬੁਖਤ ਜਿਹੜਾ ਹੈ ਉਹ ਆਦਮੀ ਕਿਉਂ ਭੈ ਇਹ ਗੱਲ ਸਮਝ ਲੈਂਦਾ ਤਾਂ ਆਪ ਵੀ ਬੈ ਬੁਖਤ ਹੋ ਜਾਂਦਾ ਹੈ ਆਦਮੀ ਦੇਰਪਾ ਕਿਉਂ ਹੈ ਪੈ ਬੁਖਤ ਕਿਉਂ ਹੈ ਕਦੇ ਭੁਗਿਆ ਜਿੱਦਣ ਇਹਨੂੰ ਇਸ ਗੱਲ ਦੀ ਸਮਝ ਆ ਗਈ ਆਪ ਵੀ ਦੇਰਪਾ ਹੋ ਫਿਰ ਪੈਦੋ ਬਾਹਰ ਜਾਣਾ ਚਾਹੁੰਦਾ ਹਰੇਕ ਆਦਮੀ ਚਾਹੁੰਦਾ ਲੇਕਿਨ ਉਹ ਸਮਝ ਨਹੀਂ ਆ ਰਹੀ ਕਿ ਪੈਦੋ ਬਾਹਰ ਜਾਇਦਾ ਖੁਸ਼ੀ ਜਾਇਦਾ ਕਿ ਮੈਂ ਸਮਝ ਨਹੀਂ ਗਿਰ ਪੈਦੀ ਸੰਤਤ ਕਰਕੇ ਹੀ ਨਿਰਪਰ ਹੋਇਆ ਹੈ ਛੇਤੀ ਹੋਈਦਾ ਤਾਂ ਯਾਰਾ ਨਿਰਪਰ ਹੋ ਗਿਆ ਸੰਤਤ ਕਰਕੇ ਪਰ ਜੇ ਹੋਣਾ ਚਾਹੁੰਦਾ ਹੋਵੇ ਤਾਂ ਛੇਤੀ ਹੋ ਜਾਂਦਾ ਹੈ ਜੇ ਕੋਲ ਡੁੱਬਦੇ ਨੂੰ ਸਾਰਾ ਬਾਹਰ ਮਿਲ ਜੂਗਾ ਤਾਂ ਛੇਤੀ ਬਾਹਰ ਆ ਜਾਂਦਾ ਥੋੜੇ ਜੇ ਸਾਰੇ ਨੜੀ ਉੱਪਰ ਆ ਜਾਂਦੇ ਫਿਰ ਕੋਈ ਆਪਣੀ ਕੋਸ਼ਿਸ਼ ਕਰ ਲਾਂਗਾ ਉਹ ਸਾਰਾ ਬੜ ਜਾਂਦਾ ਹਾਂਜੀ ਨਿਰਪੋ ਜਪੇ ਸਗਲਪੋ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੇ ਪ੍ਰਭ ਕਿਰਪਾ ਪ੍ਰਭ ਕਿਰਪਾ ਹੋਈ ਨਾ ਫਿਰ ਬਾਹਰ ਲਈ ਸਾਰਾ ਪ੍ਰਾਣੀ ਛੁਟਾ ਬਾਹਰੋਂ ਸਾਰਾ ਬੜ ਗਿਆ ਉਹ ਆਪਣੀ ਕੋਸ਼ਿਸ਼ ਰਬ ਕਰ ਪਾਤੇ ਕਹਾਣੀ ਛੋਟਾ ਛੋਟਾ ਜੀਸੂ ਪ੍ਰਭ ਰੱਖੇ ਤਿਸ ਮਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਜੀਸੂ ਪ੍ਰਭ ਰੱਖੇ ਇਹ ਪ੍ਰੋਬਲਮ ਆ ਲਿਆ ਮੈਂ ਹੁਣ ਇਹਨੂੰ ਆ ਵਾਹ ਧਿਆਨ ਹੋ ਗਿਆ ਤਿਸ ਮਾਹੀ ਦੁਖ ਉਹਨੂੰ ਲੋਕ ਕਹਦਾ ਤਿਸ ਮਾਹੀ ਉਹਨੂੰ ਦੁੱਖ ਕੋਈ ਨਹੀਂ ਜੇ ਕੋਈ ਤੋਂ ਕਦੇਣਾ ਵੀ ਚਾਏ ਉਹਨੂੰ ਉਹਨੂੰ ਦੁੱਖ ਨਹੀਂ ਲੱਗਦਾ ਉਹਦੇ ਵਾਸਤੇ ਸੰਸਾਰ ਚ ਕੋਈ ਦੁੱਖ ਨਹੀਂ ਰਹਿ ਜਾਂਦਾ ਸੰਸਾਰ ਤੋਂ ਵੀ ਛੱਡਣਾ ਨਾਤਾ ਤਾਂ ਬੇੜੀ ਡੋਬੜੀ ਜਾਂਦਾ ਉਹ ਕਹਿੰਦਾ ਵੀ ਬੇੜੀ ਡੁੱਬ ਜੇ ਉਹ ਕਹਿੰਦਾ ਵੀ ਸਾਡੂ ਬੇ ਜਾਂਦਾ ਇਹ ਕਹਿੰਦਾ ਇਹ ਡੁੱਬੇ ਛੇਤੀ ਆਪਾਂ ਆਪਣੇ ਚੱਲੀਏ ਘਰ ਨੂੰ ਉਹਨੂੰ ਲੈਣ ਆਲੇ ਆ ਜਾਣਗੇ ਬੇੜੀ ਡੁੱਬੀ ਤੇ ਫੱਟ ਉਸ ਤੋਂ ਪਤਾ ਉਹ ਤਾਂ ਬਾਹਰ ਆ ਜਾਂਦਾ ਮੰਨਿਆ ਨੇ ਖੜੇ ਨੇ ਉਹਨੂੰ ਲੈਣ ਨੂੰ ਕਰਦਾ ਨੂੰ ਉਹ ਜੀ ਨੂੰ ਹੈディ ਕੋ ਲੈਣਾ ਹਾਂਜੀ ਜਿਸ ਪ੍ਰਭ ਰੱਖਿਆ ਤੇ ਉਸ ਨਾਹੀਂ ਦੁੱਖ ਨਾਮ ਜਪਤ ਮਨ ਹੋਵਤ ਸੁਖ ਨਾਮ ਜਪਤ ਮਨ ਹੋਵਤ ਸੁਖ ਨਾਮ ਜਪਿਆ ਜੀਦਾ ਉਹਦੇ ਮਨ ਨੂੰ ਸੁਖੇ ਸੁਖਾ ਦੇ ਦੁੱਖ ਜੇ ਹੋਵੇ ਵੀ ਕਿਸੇ ਨੂੰ ਜਿਹੜਾ ਸੰਸਾਰੀ ਦੁੱਖ ਦਾ ਵੀ ਹੈ ਕਿਉਂ ਨਹੀਂ ਹੁੰਦਾ ਉਹ ਮਹਿਸੂਸ ਹੁੰਦਾ ਇਹਦਾ ਮਤਲਬ ਇਹ ਨਹੀਂ ਦੁੱਖ ਨਹੀਂ ਹੁੰਦਾ ਲੱਗੇ ਨਾ ਦੁੱਖਾ ਕਿਹਾ ਇਸ ਲੱਗੇ ਨਾ ਦੁੱਖਾ ਦੁੱਖ ਲੱਗਦਾ ਦੀ ਰੂਹ ਜੇ ਨਾਮ ਜਪਤ ਮਨ ਹੋਵਦ ਸੁਖ ਮਾਨ ਹੋਵਦ ਸੁਖ ਉਹ ਜਿਹੜਾ ਨਾਮ ਜਪਦਾ ਉਹਦੇ ਨਾਲ ਉਹ ਵੈਦਨ ਦੁੱਖ ਹਾਂ ਠੀਕ ਆਦਾ ਹੁੰਦਾ ਦੁੱਖ ਤਾਂ ਹੁੰਦਾ ਪਰ ਉਹਨੂੰ ਲੱਗਦਾ ਨਹੀਂ ਚੀਰ ਫਾੜ ਕਰਦਾ ਦੁੱਖ ਨਹੀਂ ਲੱਗਦਾ ਲੱਗੇ ਨਾ ਕੋਈ ਮਹਿਸੂਸ ਨਹੀਂ ਹੁੰਦਾ ਲੱਗਦਾ ਉਹਨੂੰ ਮਹਿਸੂਸ ਨਹੀਂ ਹੁੰਦਾ ਲੱਗੇ ਲੱਭਦਾ ਜੜਾ ਉਦੋਂ ਦਾ ਲੱਭਦਾ ਮਹਿਸੂਸ ਹੋਣੇ ਵਾਸਤੇ ਲੱਗੇ ਲੱਭਦਾ ਪੰਜਾਬੀ ਦਾ ਕਹਿੰਦਾ ਮੈਨੂੰ ਮਰ ਲੱਗਦੀ ਹੀ ਨਹੀਂ ਤਾਂ ਹੈਗੀ ਐ ਤੈਨੂੰ ਜ਼ਿਆਦਾ ਲੱਗਦੀ ਹੈਗਾ ਨਾ ਮੈਨੂੰ ਜ਼ਿਆਦਾ ਲੱਗਦੀ ਹੈ ਬੱਚੇ ਕਹਿੰਦਾ ਵੀ ਮੈਨੂੰ ਤਾਂ ਲੱਗਦੀ ਹੀ ਉਹ ਥਰਦੀ ਪੰਜਾਬੀ ਦਾ ਬੋਲ ਜਿਹੜਾ ਮੇ ਤੇ ਕੌੜੀ ਹੈ ਹੀ ਹੋਈ ਹੈ ਰਚਦਾ ਹੁੰਦੀ ਹੋਈ ਹੈ ਦੁੱਖ ਦੁੱਖ ਦਾ ਹੈਗਾ ਉਹ ਇੱਕੋ ਜੀ ਦਾਲ ਸਮਝੀ ਪਾਈ ਹੈ ਉਹਨੂੰ ਲੱਗਦੀ ਉਹਨੂੰ ਨਹੀਂ ਲੱਗਦੀ ਉਹ ਮਸੂਦੀਆਂ ਨਹੀਂ ਹੁੰਦੀ ਉਹਦਾ ਸਵਾਰ ਉਹਨੂੰ ਬਰਦਾਸ਼ਤ ਆ ਦੀਵਸ ਗੁਰੂ ਦੁੱਖ ਬਰਦਾਸ਼ਤ ਦਾ ਉਹ ਬਰਦਾਸ਼ਤ ਹੈ ਨਹੀਂ ਬਰਦਾਸ਼ਤ ਦੀ ਗੱਲ ਹੈ ਇਸ ਕਰਕੇ ਦੁੱਖ ਸੁੱਖ ਮੰਦੀ ਬਣਦਾ ਹੈ ਇਹ ਮੰਦੀ ਬਣਦਾ ਬਰਦਾਸ਼ ਵੀ ਸ਼ਕਤੀ ਦੀ ਬਣਦਾ ਹੈ ਦੁੱਖ ਸੁੱਖ ਹੋਰ ਕੁਝ ਤੇ ਜੋ ਹੈ ਸਭ ਤੋਂ ਨੇੜੇ ਸ਼ਬਦ ਹੈ ਉਹ ਬਰਦਾਸ਼ ਹੈ ਇਹਦੇ ਨੂੰ ਬਰਦਾਸ਼ ਹੈ અપਮਾਨ ਜਿਹੜਾ ਹੈ ਕਟਾਵਾਤਾ ਸਾਰੀ ਬਰਦਾਸ਼ ਦੀ ਬਿਕਾ ਹੈ ਕਟਾਵਾਤਾ ਬਰਦਾਸ਼ ਹੁੰਦਾ ਕੌਮਾਂ ਸਰਦੀ ਗਰਮੀ ਆ ਕੇ ਤਾਂ ਬਰਦਾਸ਼ਤ ਹੁੰਦੀ ਹੈ ਕਹਿੰਦੇ ਸਿਰਫ ਬਰਦਾਸ਼ਤ ਦੀ ਸ਼ਕਤੀ ਵੱਧਦੀ ਹੈ ਸਾਡੇ ਵਿੱਚ ਨਾਮ ਨਾਲ ਹਰ ਗੀ ਨੂੰ ਬਰਦਾਸ਼ਤ ਕਰਨਾਂ ਦੀ ਸ਼ਕਤੀ ਵੱਧਦੀ ਹੈ ਬਸ ਬਿਲ ਪਾਵਰ ਵੱਧਦੀ ਹੈ ਉਦੋਂ ਮਹਿਸੂਸ ਹੁੰਦੀ ਹੋ ਜਿਸ ਪ੍ਰਭ ਰੱਖੇ ਤਿਸ ਨਾਹੀ ਨਾਮ ਜਪਤ ਮਨ ਹੋਵਤ ਸੁਖ ਜਿਸ ਪ੍ਰਭ ਰੱਖੇ ਤਿਸ ਨਾਹੀ ਦੁੱਖ ਜਿਸ ਪ੍ਰਭ ਰੱਖੇ ਉਹਨੂੰ ਦੁੱਖੋਂ ਡਰਾਈ ਬਰਦਾਸ਼ਤ ਉਹ ਕਹਤਾ ਕੋਈ ਨਹੀਂ ਹੁੰਦਾ ਯਾਰ ਤਖਣਾ ਹੋਰ ਕੋਈ رائے ਦੇਣ ਵਾਲਾ ਹੋਵੇ ਦੁੱਖ ਹੁੰਦਾ ਲੋਕਾਂ ਹੈ ਤੋ ਹੌਸਾ ਦੇਣਾ ਵੀ ਹੁੰਦਾ ਇਹ ਨਾ ਹੁੰਦਾ ਨਾ ਕੋਈ ਕੋਈ ਨਹੀਂ ਹੋਣਾ ਤਗੜਾ ਹੋ ਕੋਈ ਨਹੀਂ ਅਰੇ ਅਰੇ ਦੇ ਦੇ ਇਹ ਤਾਂ ਹੁਦਾਈਆ ਦਿੱਲੀ ਸਿਟੀ ਦਾ ਹੁੰਦਾ ਅਸੀਂ ਤੇਰੇ ਨਾਲ ਆਏ ਆ ਖੜੇ ਪਰਵਾਹ ਨਾ ਕਰ ਚਿੰਤਾ ਨਾ ਕਰ ਕਹਾਣੀਆਂ ਸਾਵਣੀਆਂ ਐ ਹੋਇਆ ਐ ਹੋਇਆ ਭਗਤਾਂ ਨਾਲ ਖੜਾ ਵਿੱਚ ਹੌਸਲਾ ਤਾਂ ਹਾਂ ਚਿੰਤਾ ਜਾਏ ਬਟੇ ਹੰਕਾਰ ਕਿਸ ਜਨ ਕੋ ਕੋਈ ਨਾ ਪਹੁੰਚਣ ਦਾ ਇੱਥੇ ਆ ਕੇ ਜਾਂਦਾ ਜਾਏ ਬਟੇ ਹੰਕਾਰ ਮਾਇਆ ਸੁਈ ਇੱਥੇ ਜਾ ਗਏ ਜਿੰਤਾ ਜਾਏ ਬਿਟੇ ਹੰਕਾਰ ਇਹ ਜਿਹੜੀ ਆ ਜਿੰਤਾ ਨਾ ਸਾਰਾ ਨੁਇਬ ਮਾਰੀ ਜਦੋਂ ਇਹ ਜਲੀ ਗਈ ਸਮਝੋ ਹੰਕਾਰ ਗਏ ਜਦੋਂ ਹੰਕਾਰ ਨਾਲੇ ਜਾਂਦਾ ਜੋ ਹੰਕਾਰ ਚਲੇ ਹੁੰਦਾ ਇੱਥੇ ਤੱਕ ਹੰਕਾਰ ਚਲੇ ਆਉਂਦਾ ਜੋ हां बजाकते आ वो फिर जन दुए ने विरोध खड़े थे उता संसदلوں کہہ ਨੇ ਜਿਹੜੀ ਬੀੜਿਆਂ ਦੀ ਸੰਤਤ ਉਹ ਵੀ ਉਹਨੂੰ ਵੀ ਕਹਿ ਰਹੇ ਨੇ ਦੱਸਾ ਉੱਪਰ ਨਹੀਂ ਬਜਾ ਬਜਾਅ ਤਾਂ ਨੇ ਉਹ ਛੱਡ ਗਿਆ ਉਹ ਬੀੜੇ ਛੱਡ ਕੇ ਮੰਨ ਗਏ ਸੁਣ ਜੇ ਉਹਨਾਂ ਨੇ ਵੀ ਸੁਣ ਲਈ ਸੀ ਚੰਦ ਮੰਨ ਗਿਆ ਅ ਕਾਰ ਵੀ ਖੜਾ ਅਜੋ ਉਸ ਕਾਲਕ ਅਸਤੇ ਬਸਦੀ ਹੋਇਆ ਸਾਡੀ ਗੁਰਬਾਣੀ ਸੁਣ ਕੇ ਯਹਾਨ ਨੇ ਸੰਕਰਨ ਨੇ ਗੁਰਬਾਣੀ ਨਹੀਂ ਸੁਣੀ ਤੇ ਪੰਡਤਾਂ ਨੇ ਸਾਡੀ ਗੁਰਬਾਣੀ ਨਹੀਂ ਪੜੀ ਕਸਤੇ ਫਸਦੀ ਹੋਇਆ ਬੱਡਾ ਉਲਟੇ ਕਰ ਗਿਆ ਹੁਲੜੀ ਕਰੀ ਜਾਂਦੇ ਇਹ ਕਾਲ ਨਹੀਂ ਕਸਤੇ ਨਾ ਉਹ ਨਾਮ ਨਾਲ ਵਿਰੋਧ ਹੈ ਜਿਹਦਾ ਹੁਕਮ ਨਾਲੇ ਵਿਰੋਧ ਹੋਵੇ ਇਹ ਨੂੰ ਕੀ ਸਮਝਦਾ ਇਹ ਸਮਝਦਾ ਨਾ ਹੋਇਆ ਮਰੇ ਜੰਮੇ ਨਾ ਭੈਣਾਂ ਬਣੀ ਭੈਣਾਂ ਹੋਵੇ ਜੇ ਨਾ ਭਾਏ ਜੀ ਨਾ ਰਾਤ ਦਿ ਲੋਈ ਨੂੰ ਪੀਕਰ ਕੋਈ ਲੋਈ ਹੋਗਾ ਫਰੇ ਮਾਰੀ ਵੇ ਚਿੰਤਾ ਗਾਉਂ ਨਹੀਂ ਕਰਦਾ ਜਿਹਨੂੰ ਆਪਣੀ ਇੱਜ਼ਤ ਦਾ ਖਿਆਲ ਹੋਵੇ ਜੇ ਨਾ ਇੱਜ਼ਤ ਦਾ ਕੋਈ ਖਿਆਲ ਨਹੀਂ ਇੱਥੇ ਹੀ ਪੱਤਰ ਲੁੱਟੀ ਜਾਣੀ ਇੱਥੇ ਹੀ ਉਹਨਾਂ ਨੂੰ ਜਮਾਨਤ ਦਾ خیال ਹੈ ਕੋਈ ਨਹੀਂ ਵੀ ਕੋਈ ਚੀਜ਼ ਉਹ ਕਰਾਉਂਦਾ ਹਾਂ ਉਹ ਬਿਦਲਦਾ ਕਰਾਈਂ ਦੋ ਹਾਂ ਕਰਾਈਂ ਦੋ ਉਹ ਦੱਸਦਾ ਕਿ ਦੂਜਾ ਦਾ ਖਿਆਲ ਹੋਵੇ ਮੇਰੇ ਨੂੰ ਜਿੰਦਾ ਖਿਆਲ ਹੀ ਨਹੀਂ ਕਿ ਉਹਨਾਂ ਨੇ ਤੋਂ ਉਹ ਤਾਂ ਕੰਨ ਲੀਡਰਸ਼ਿਪ ਜਾ ਕੇ ਬਣਦਾ ਚੰਕ ਦੀ ਹੈ ਵੀ ਆਹ ਇੱਥੇ ਹੀ ਲੀਡਰ ਆ ਜੇੜਾ ਜੇੜੇ ਹੀ ਲੀਡਰ ਹੁੰਦਾ ਉਹਦਾ ਦਾਸ ਹੁੰਦਾ ਜਿਹੜੇ ਜੇੜੇ ਬਣਦਾ ਗੱਲ ਠੀਕ ਹੈ ਅਜਿਹੇ ਹੀ ਆ ਸੰਸਾਰ ਦੇ ਵਿੱਚ ਲੀਡਰ ਹੁੰਦੇ ਨੇ ਅੱਗੇ ਦਾ ਦਾਸ ਹੁੰਦੇ ਨੇ ਕੋਈ ਲੀਡਰ ਕਿੱਥੇ ਕੋਈ ਜੇ ਜੇ ਲੀਡਰ ਬਣਦੇ ਨੇ ਜੇ ਜੇ ਲੀਡਰ ਬਣ ਜਾਂਦੇ ਨੇ ਇਹ ਲੀਡਰ ਬਣਾ ਲੀਡਰ ਵੀਗੜ ਇਹ ਜੇ ਦੇ ਵਿੱਚ ਆ ਕਬ ਸ਼ਾਇਦ ਉਹਨਾਂ ਨੂੰ ਕਹਿਣਾ ਤੇ ਇਹ ਗੱਲ ਗਹਾਂ ਦੀ ਦਾ ਨੂੰ ਗਿਆਨ ਹੋਵੇ ਵਾਹ ਤੂੰ ਏਲੂ ਮੰਦੇ ਹੋਣ ਅਸੀਂ ਦੂਈ ਬੜੀ ਥੋੜੀ ਜਿਹੀ ਬਣਾ ਲਈ ਏਲ ਜੇ ਜੇਦਾ ਆਉ ਤਾਂ ਜੇੜ ਚ ਬਿਝੜ ਨਹੀਂ ਆ ਕੋਈ ਨਹੀਂ ਉਤਾਰੋ ਚਲੋ ਜੇੜ ਜੇੜ ਮੰਨ ਲੈਣੇ ਹਾਂਜੀ ਚਿੰਤਾ ਜਾਇ ਮਿਟੇ ਅਹੰਕਾਰ ਇਸ ਜਨ ਕੋ ਕੋਈ ਨਾ ਪਹੁੰਚਣਾ ਤੇ ਜਨ ਕੋ ਕੋਈ ਨਾ ਪਹੁੰਚਣਾ ਪਹਿਲਾਂ ਤਾਂ ਜੇੜ ਹੈਗੀ ਆ ਆ ਸਾਡਾ ਰਾਮ ਉਹਦਾ ਰਾਮ ਗਰਮ ਦੂਜੀ ਜਿਹੜਾ ਸਰੀਰ ਪ੍ਰੇਤ ਪਿਜਰ ਆ ਜੇੜ ਜਵੰਦਾ ਹੈ ਭੱਜ ਕੇ ਦਿਖਾਵੇ ਕਿਧਰ ਪੈਂਦਾ ਹੱਥ ਘੜੀ ਲਾ ਕੇ ਨਾਲੇ ਲੈ ਜਾਂਦੇ ਜੇੜ ਜੇ ਤਾਂ ਹੀ ਲੱਗ ਜਾਂਦੇ ਹੱਥ ਘੜੀ ਕੋਸਲ ਬਰਉਉਦੇ ਨੇ ਗੁਰਤਾ ਤਾਂ ਲਾਗੇ ਵੀ ਭਜੂਗਾ ਜੇੜ ਜਾਇਓ ਆ ਛੇੜ ਜੇੜੀ ਪਿੰਜਰੇ ਇਹਦਾ ਨਾ ਪਿੰਜਰੇ ਪ੍ਰੇਤ ਪਿੰਜਰਾ ਹੈ ਜੇੜ ਹੈ ਉਦੇ ਬਾਦ ਹੋ ਰੂ ਜਿਹੜਾ ਇਹੋ ਦੀ ਜਿਹੜੀ ਇਹ ਜਿਹੜ ਮੰਦੇ ਨੇ ਹਾਂ ਜੀ ਚਿੰਤਾ ਜਾਏ ਬਟੇ ਹੰਕਾਰ ਸਿਨ ਜਨ ਕੋ ਕੋਈ ਨਾ ਪਹੁੰਚਣਾ ਚਿੰਤਾ ਜਾਏ ਬਟੇ ਹੰਕਾਰ ਜਿੱਦਾਂ ਹੰਕਾਰ ਜਿੱਦਾਂ ਚਿੰਤਾ ਚਲੀ ਗਈ ਮੰਨ ਲਿਓ ਹੰਕਾਰ ਮਿਲ ਗਿਆ ਨਹੀਂ ਮੰਨਿਓ ਨਾ ਹੰਕਾਰ चिंता का पता लगदा है सब नु चिंता ज्यादा करके बंदेया सी थोड़ी चिंता कोई भी नहीं कहदा मैनुओ ते ज्यादा चिंता है सरकार मैनु हई नहीं सरकार मैनु है नहीं चिंता मैनु सबज ज्यादा है ते मन दे ने लोग एस करके पाठ पढ़दे बे बेचारदे सी पाठ पढ़े और बे बेचारा जो कुछ कहलेタルबो वाला सरकार बदी गया ਤਰਪ ਕਰਮ ਜੋ ਕੀਤੇ ਹੰਕਾਰ ਦੇ ਵਧਾ ਲਿਆ ਤੋਂਕਾਰ ਰੜਕਿਆ ਹੀ ਕਿਤੇ ਰੜਕਿਆ ਨਹੀਂ ਕਿਤੇ ਸੋਕਾਰ ਆਪ ਨੂੰ ਨਹੀਂ ਰੜਕਦਾ ਦੂਏ ਨੂੰ ਰੜਕਦਾ ਦੂਏ ਨੂੰ ਹੰਕਾਰ ਰੜਕਦਾ ਸਾਨੂੰ ਚਿੰਤਾ ਰੜਕਦੀ ਸੋਕਾਰ ਦਾ ਰੜਕਦਾ ਦੂਏ ਨੂੰ ਚਿੰਤਾ ਰੜਕਦੀ ਹੈ ਸਾਨੂੰ ਤਾਂ ਸਮਝ ਲਓ ਕਿ ਜਿਹੜਾ ਦੂਏ ਨੂੰ ਰੜਕਦਾ ਉਹ ਨਾਲ ਰੜਕਦਾ ਜਿੰਨਾ ਚਿਰ ਚਿੰਤਾ ਰੜਕਦੀ ਹੈ ਜਦੋਂ ਤੇਰੀ ਜਨਤਾ ਗਈ ਤੂੰ ਦੂਏ ਨੂੰ ਲੜਕੇਗਾ ਹੀ ਨਹੀਂ ਗੱਲ ਤੇਰਾ ਜਾਊਗਾ ਨਹੀਂ ਲੋਕਾਂ ਮੰਨੀ ਮੰਗਾ ਤਾਂ ਲੋਕਾਰ ਹੈ ਨਹੀਂ ਤੂੰ ਕਹੀ ਜਾ ਬੰਦੂ ਹੈ ਜੀ ਤੂ ਕਲਖੇ ਜਾਏ ਮਠੇ ਜਨ ਇਹ ਬਹੁਤ ਥੀਸ ਠੀਕ ਇਹ ਤਾਂ ਕੋਈ ਜਗਾ ਹੈ ਜੀ ਸਾਨੂੰ ਪਛਾਣ ਦਾ ਦੀ ਜਿੱਤੇ ਹੋ ਸਕਦੀ ਤੇ ਅੰਤਰ ਹੋਵੇ ਜੋ ਜੇ ਚਲਾਇਆ ਚੁਗਾ ਦੁੱਖ ਵੀ ਇਹੀ ਗੱਲ ਕਹੀ ਕੀ ਹੈ ਚਿੰਤਾ ਤਰੰ ਆ ਜਾਂ ਧਰਤੀ 'ਚ ਜੜ ਧਰਤੀ ਨੂੰ ਜੜ ਦੁਗੀ ਕਰਦੀ ਆ ਛੱਡ ਦੇ ਰਾਹ ਜੜਨੇ ਜਾਣਾ ਜਿੱਦ ਨੂੰ ਧਰਤੀ ਰਵਾਦੀ ਛਲਾਉਂਦੀ ਤੇ ਜੜ ਚਲਦੀ ਆ ਧਰਤੀ ਨੂੰ ਪਾੜਦੀ ਗਈ ਆ ਇਵੇਂ ਚਿੰਤਾ ਹੱਦ ਨੂੰ ਪਾਰਦੀ ਹੈ ਜਾਂ ਕਾਰਵਦ ਕਾਰ ਦੀ ਜੜ ਹਿਰਦੇ ਚ ਉਹ ਰੂਪ ਉਹਦਾ ਚਿੰਤਾ ਜਿਵੇਂ ਦਰਖਤ ਦੀ ਜੜ ਹੈ ਧਰਤੀ ਚ ਫਿਰਦਾ ਧੱਤੀ ਹੈ है بڑا ਦਰਸ਼ਾ ਜੇ ਕਾਰਦਾ ਉਹਦੀ ਜੜਾਂ ਵੀ ਥੱਲੇ ਨੇ ਉਹਦੀਆਂ ਚਿੰਤਾਵਾਂ ਵੀ ਥੱਲੇ ਨੇ ਜਿੱਟਾ ਰੋਗੂ ਚਾਉਂਦੇ ਆ ਚਿੰਤਾਵਾਂ ਨੇ ਬੜੇ ਬੜੇ ਜਿਹਦੀਸਾ ਲੋਗ ਕੋ ਕੋ ਬਿਆਪੈ ਚਿੰਤਾ ਰੋਗ ਬੋਬਜਨ ਰੋਗ ਬਿਆਪੈ ਬਹੁਤੜਾ ਨੇ ਚਿੰਤਾ ਦੀਆਂ ਜਿੰਨੇ ਢਾਣੇ ਉੱਤੇ ਨੇ ਉੰਨੀ ਜੜ੍ਹਾਂ ਥੱਲੇ ਨੇ ਜਿੰਨੇ ਛੋਟੇ ਢਾਣੇ ਨੇ ਉੰਦੀਆਂ ਜੜ੍ਹਾਂ ਛੋਟੀਆਂ ਨੇ ਲਾਲ ਬੱਦਰਾਂ ਦੇ ਵਾਤਾ ਬੱਦੀਆਂ ਨੇ ਉਹਨੀਆਂ ਜੜਾਂ ਜਨਨ ਰਸ ਵਾਧਾ ਉਹ ਨਹੀਂ ਜੜਾਂ ਵਾਦੀਆਂ ਸੱਜੇ ਜਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਜਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਉਹ ਜਦ ਦਾ ਮੁਕਾਵਲ ਕਿਹੜਾ ਜਾਨਾ ਹੋ ਚਿੰਤਾ ਜੈ ਮਿਟ ਗਿਆ ਜੇ ਜਾਣ ਕੋਈ ਨਾ ਪਰੋ ਜਾਣੇ ਉਹ ਜਨ ਤੋਂ ਬੜਾ ਨਹੀਂ ਹੈ ਜਿਦਾ ਹੁੰਦਾ ਜਨ ਤੋਂ ਵੱਡਾ ਹੀ ਕੋਈ ਇਹਦੇ ਵਿੱਚ ਕੋਈ ਪਦਵੀ ਹੋਏ ਗੁਰੂ ਨੂੰ ਨਹੀਂ ਕੋਈ ਪਦਵੀ ਹੋਏ ਜੀ ਗੁਰੂ ਤਾਂ ਪਰਮੇਸ਼ਰ ਹੈ ਕਿਤੇ ਵੀ ਗੁਰਬਾਣੀ 'ਚ ਗੁਰੂ ਦਾ ਜ਼ਿਕਰ ਨਹੀਂ ਗੁਰੂ ਤਾਂ ਦੇਣ ਵਾਲਾ ਹੈ ਗੁਰੂ ਤਾਂ ਬਖਸ਼ਿਸ਼ ਕਰਨ ਵਾਲਾ ਹੈ ਗੁਰੂ ਨ ਦਾ ਸਿਰ ਪਰਪਦੇ ਆਂਡੇ ਜੋ ਬਾਹਰ ਕਰਨਾ ਸ਼ਬਦ ਗੁਰੂ ਹੈ ਉਹ ਗੁਰਬਾਨੀ ਨਹੀਂ ਸ਼ਬਦ ਗੁਰੂ ਹੈ ਇਹ ਗੁਰਬਾਨੀ ਹੈ ਪੋਥੀ ਅਖਰਾਂ ਦੇ ਵਿੱਚ ਪੋਥੀ ਪਰਮੇਸ਼ਰ ਦਾ ਧੰਨ ਜ਼ਰੂਰ ਹੈ ਜੋ ਕੁਝ ਕਿਹਾ ਸੀ ਜਿਨ੍ਹਾਂ ਨੇ ਕਿਹਾ ਸੀ ਉਹਨਾਂ ਨੂੰ ਪਤਾ ਸੀ ਗਿਆਨ ਸੀ ਕੀ ਕਹਿਣਾ ਇਹਨੂੰ ਤਾਂ ਪਤਾ ਹੀ ਨਹੀਂ ਸੀ ਚੜੀ ਸੀ ਤਿੰਨ ਵਾਰ ਉੱਠ ਫਿਰ 100 ਰਾਤ ਸਾਰੀ ਫਸ ਗਈ ਮੁਖਾ ਨੇ ਉਲਟ ਫੋੜਨਾ ਰੱਖ ਲੈ ਆਪਣੀ ਵਰਦੀ ਨੂੰ ਪਤਾ ਹੈ ਨਹੀਂ ਸੀ ਗੁਰਬਾਣੀ ਸੋਚੀ ਹੈ ਨਹੀਂ ਸੀ ਕੋਈ ਹੌਂ ਰੱਖਵੇ ਨਹੀਂ ਹਾਂਜੀ ਕਾਰਜ ਪੂਰਾ ਸਿਰ ਉੱਪਰ ਸਾਡਾ ਗੁਰ ਸੂਰਾ ਸਾਡਾ ਗੁਰ ਸੂਰਾ ਸਦੇ ਉੱਪਰ ਸਾਰਾ ਸਾਡਾ ਬੜਾ ਕੇ ਜਿਹੜਾ ਚਿੰਤਾ ਜਾਏ ਬਿਟੇ ਹੰਕਾਰ ਹੈ ਲੋ ਇਹ ਜਿਹੜਾ ਜਾਨਾ ਇਹ ਉੱਤੇ ਆਪਣੇ ਕੀ ਸੰਬੰਧ ਦਾ ਗੁਰਸੂਰ ਇਹਨੂੰ ਆਪਣੇ ਉੱਪਰ ਸਮਝਦਾ ਇਹਦੇ ਆ ਗੁਰਸੂਰ ਆਨ ਸਿਰ ਕੁ ਬਣ ਕੇ ਰਹਿੰਦਾ ਤਾਂ ਸਿਰ ਕੁ ਬਣ ਕੇ ਰਹਿੰਦਾ ਥਾੜਾ ਗੁਰਸੂਰ ਨਾਨਕ ਤਾਂਗੇ ਨਾਨਕ ਬਸ ਉਹਦਾ ਕਾਰਜ ਪੂਰਾ ਜਿਹਦਾ ਸਤਗੁਰ ਜਿਹੜਾ ਹੈਗਾ ਸ਼ਕਤੀਸ਼ਾਲੀ ਹੈ ਥਾੜਾ ਸਰ ਤੋਂ ਵੱਡਾ ਹਾਂਜੀ ਮਤ ਪੂਰੀ ਬੜੇ ਨੂੰ ਕਹਿੰਦੇ ਮਤ ਪੂਰੀ ਅਵਟ ਜਾਂ ਮਜ਼ੋਰ ਕਰ ਉੱਠ ਕੇ ਖੜਾ ਹੋ ਜਾਣਾ ਵਿਛੜਾ ਹੁੰਦਾ ਬੈਠਾ ਛੋਟਾ ਹੁੰਦਾ ਖੜਾ ਵੱਡਾ ਹੋ ਜਾਂਦਾ ਹਾਂਜੀ ਮਤ